ਹੁਣ ਮੈਂ ਆਪ ਜੀ ਨੂੰ ਬ੍ਰਹਮਰੀ ਪ੍ਰਾਣਾਯਾਮ ਬਾਰੇ ਦੱਸ ਰਿਹਾ ਹਾਂ ਇਸ ਵਿੱਚ ਦੋ ਅੱਖਾਂ ਨੂੰ ਬੰਦ ਕਰ ਲੈਣਾ ਹੈ ਅੰਗੂਠੇ ਦੇ ਨਾਲ ਦੀਆਂ ਦੋ ਉਂਗਲਾਂ ਨੂੰ ਅੱਖਾਂ ਦੇ ਉੱਤੇ ਰੱਖ ਲਓ ਸੱਜੇ ਤੇ ਖੱਬੇ ਦੋ ਹੱਥਾਂ ਦੀ ਤੀਸੀ ਤੀਸੀ ਉਂਗਲੀ ਦੋਵਾਂ ਨਾਸਕਾ ਦੁਆਰਾਂ ਦੇ ਸੱਜੇ ਤੇ ਖੱਬੇ ਆ ਜਾਏ ਬਾਹਰ ਦੀ ਸਾਈਡ ਦੋਆਂ ਚੀਚੀਆਂ ਨੂੰ ਪਾਓ ਚੌਥੀ ਚੌਥੀ ਉਂਗਲੀ ਨੂੰ ਛੋਟੀ ਤੇ ਰੱਖ ਲਓ ਦੋ ਅੰਗੂਠਿਆਂ ਨੂੰ ਦੋਹਾਂ ਕੰਨਾਂ ਦੇ ਸਰਾਖਾਂ ਦੇ ਅੰਦਰ ਦਸਾ ਲੈਣਾ ਹੈ ਤਾਂ ਕਿ ਦੋਵੇਂ ਕੰਨਾਂ ਦੇ ਸਰਾਖ ਚੰਗੀ ਤਰ੍ਹਾਂ ਬੰਦ ਹੋ ਜਾਣ ਤੇ ਅਤੇਬਾਰ ਦੀ ਆਵਾਜ਼ ਨਾ ਆਏ ਹੁਣ ਲੰਮਾ ਸਵਾਸ ਅੰਦਰ ਪਰ ਕੇ ਜ਼ੁਬਾਨ ਦੀ ਨੋਕ ਨੂੰ ਮੋੜ ਕੇ ਤਾਲੂਨਾ ਲਗਾ ਲੈਣਾ ਹੈ ਨੂੰ ਨੂੰ ਬੰਦ ਕਰ ਲੈਣਾ ਹੈ ਅਤੇ ਪਵਰੇ ਦੀ ਤਰ੍ਹਾਂ ਗੁੰਡ ਪੈਦਾ ਕਰਨੀ ਹੈ ਦੁਬਾਰਾ ਫਿਰ ਦਾਸਕਾ ਦੁਬਾਰਾ ਸਾਣੀ ਸਾਥ ਨੂੰ ਅੰਦਰ ਪਰੋ ਅਰੇ ਫਿਰ ਗੁੰਡ ਪੈਦਾ ਕਰੋ ਦੁਬਾਰਾ ਫੇਰ ਸਵਾਸ ਅੰਦਰ ਖਿਚੋ ਇਸ ਦੇ ਨਾਲ ਦਿਮਾਗ ਦੇ ਅੰਦਰ ਇੱਕ ਅਜੀਬ ਤਰ੍ਹਾਂ ਦੀ ਗੂੰਜ ਪੈਦਾ ਹੋਏਗੀ ਕੰਨਾਂ ਵਿੱਚੋਂ ਸੇਕ ਨਿਕਲੇਗਾ ਅਤੇ ਅੱਖਾਂ ਦੇ ਅੰਦਰ ਠੰਡਕ ਮਹਿਸੂਸ ਹੋਏਗੀ ਇਸ ਪ੍ਰਾਣ ਆਯਾਮ ਨੂੰ बार ਪੰਜ ਛੇ ਵਾਰ ਹਰ ਰੋਟ ਦਰਾਣਾ ਬੜੀ ਅੱਛੀ ਗੱਲ ਹੈ ਹੁਣ ਮੈਂ ਆਪ ਜੀ ਨੂੰ ਨਿਉੜੀ ਬਾਰੇ ਕੁਝ ਦੱਸ ਰਿਹਾ ਹਾਂ ਨਿਉੜੀ ਕੁਝ ਦਿਨ ਊਧਿਆਨ ਬਾਗ ਅਤੇ ਊਧਿਆਨ ਕਿਰਿਆ ਦਾ ਅਭਿਆਸ ਕਰਾਂਗੇ ਹੁਣ ਆਪਣੀ ਜਗ੍ਹਾ ਤੇ ਖੜੇ ਹੋ ਜਾਓ ਪੈਰਾਂ ਦਾ ਫਾਸਲਾ ਫੁੱਟ ਡੇਢ ਫੁੱਟ ਕਰ ਲਓ ਮੈਂ ਆਪ ਜੀ ਨੂੰ ਊਧਿਆਨ ਅਤੇ ਊਧਿਆਨ ਕਿਰਿਆ ਕਰਾਵਾਂਗਾ ਊਧਿਆਨ ਬਾਗ ਕਿਰਿਆ ਕਰਨ ਤੋਂ ਬਾਅਦ ਹਰ ਹੀ ਨਿਯਮ ਸ਼ੁਰੂ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਉਹ ਧਿਆਨ ਬੰਦ ਕਰਵਾ ਰਿਹਾ ਹਾਂ। ਅੱਗੇ ਵੱਲ ਚੁੱਕਦੇ ਹੋਏ ਦੋਵੇਂ ਹੱਥ ਗੋਡਿਆਂ ਤੇ ਰੱਖ ਲਓ। ਪਹਿਲਾਂ ਆਪਣੇ ਨੱਕ ਦੁਆਰਾ ਸ਼્વાસ ਨੂੰ ਅੰਦਰ ਭਰੋ ਅਤੇ ਫਿਰ ਮੂੰਹ ਰਾਈਂ ਇੱਕਦਮ ਫੁਕਾਰਾ ਮਾਰਦੇ ਹੋਏ ਸ਼્વાસ ਨੂੰ ਬਾਹਰ ਸੁੱਟ ਦਿਓ ਅਤੇ ਬਾਹਰ ਹੀ ਰੋਕ ਲਓ। ਦੇਖੋ। ਸਵਾਸ ਨੂੰ ਬਾਹਰ ਰੋਕਣ ਤੋਂ ਬਾਅਦ ਪੇਟ ਨੂੰ ਖਿੱਚ ਕੇ ਅੰਦਰ ਦੀ ਸਾਈਡ ਰੀਡ ਦੀ ਹੱਡੀ ਨਾਲ ਲਗਾ ਲਓ ਪੂਰਾ টান ਲਾ ਕੇ ਪੇਟ ਨੂੰ ਅੰਦਰ ਦੀ ਸਾਈਡ ਖਿੱਚ ਕੇ ਰੱਖੋ ਯਤਾਸ਼ਕ ਜਿੰਨੀ ਦੇਰ ਤੱਕ ਤੁਸੀਂ ਸਵਾਸ ਨੂੰ ਬਾਹਰ ਰੋਕ ਸਕਦੇ ਹੋ ਰੋਕ ਕੇ ਰੱਖੋ ਅਰੇ ਪੇਟ ਵੀ ਖਿੱਚ ਕੇ ਰੀਡ ਦੀ ਹੱਡੀ ਨਾਲ ਲਗਾ ਕੇ ਰੱਖੋ ਜਦੋਂ ਦੇਖੋ ਕਿ ਸਵਾਸ ਮੈਂ ਹੁਣ ਅੰਦਰ ਨਹੀਂ ਰੋਕ ਸਕਦਾ ਸਵਾਸ ਨੂੰ ਅੰਦਰ ਲੈ ਲਓ ਬਾਹਰ ਲੈ ਲਓ ਚਾਲੂ ਕਰ ਦਿਓ ਅਤੇ ਪੇਟ ਨੂੰ ਵੀ ਟਲਾ ਛੱਡ ਦਿਓ ਚਾਰ ਪੰਜ ਨਾਰਮਲ ਸਵਾਸ ਲੈਣ ਤੋਂ ਬਾਅਦ ਦੁਬਾਰਾ ਫਿਰ ਸਵਾਸ ਨੂੰ ਬਾਹਰ ਛੱਡ ਦਿਓ ਅਤੇ ਬਾਹਰ ਹੀ ਰੋਕ ਲਓ ਪੇਟ ਨੂੰ ਫੇਰ ਖਿੱਚ ਕੇ ਰੀੜ ਦੀ ਹੱਡੀ ਨਾਲ ਲਗਾਉਣ ਦੀ ਕੋਸ਼ਿਸ਼ ਕਰੋ ਪੰਜ ਛੇ ਵਾਰ ਇਸ ਕਿਰਿਆ ਨੂੰ ਦਰਾਓ ਇਹ ਹੈ ਉਦਿਆਨ ਬੱਦ ਹੁਣ ਉਦਿਆਨ ਕਿਰਿਆ ਕਰਾਂਗੇ ਉਸੇ ਤਰ੍ਹਾਂ ਹੀ ਨਾਸਕਾ ਦੁਆਰਾ ਸਾਣੀ ਸਵਾਸ ਨੂੰ ਅੰਦਰ ਪਰੋ ਇੱਕਦਮ ਨੂੰ ਥਾਣੀ ਫੁਕਾਰਾ ਮਾਰਦੇ ਹੋਏ ਸਵਾਸ ਨੂੰ ਬਾਹਰ ਸੁੱਟ ਦਿਓ ਬਾਹਰ ਰੋਕ ਲਓ ਪੇਟ ਨੂੰ ਖਿੱਚ ਕੇ ਰੀੜ ਦੀ ਹੱਡੀ ਨਾਲ ਲਗਾਓ ਢਿੱਲਾ ਛੱਡ ਦਿਓ ਫਿਰ ਖਿੱਚ ਕੇ ਰੀੜ ਦੀ ਹੱਡੀ ਨਾਲ ਲਗਾਓ ਢਿੱਲਾ ਛੱਡ ਦਿਓ ਫਿਰ ਪੇਟ ਨੂੰ ਅੰਦਰ ਖਿੱਚੋ ਟਿੱਲਾ ਛੱਡ ਦਿਓ ਤੇਜ਼ੀ ਨਾਲ ਅੰਦਰ ਤੇ ਬਾਹਰ ਚਲਾਓ ਉੱਡਿਆਨ ਕਿਰਿਆ ਚੰਦੇ ਹੋ ਜਾਓ 65 ਨਾਰਮਲ ਸਵਾਸ ਦੁਬਾਰਾ ਫੇ ਉਸੇ ਤਰ੍ਹਾਂ ਚੁੱਕ ਜਾਣਾ ਹੈ ਉਸੇ ਤਰ੍ਹਾਂ ਹੀ ਸਵਾਸ ਨੂੰ ਬਾਹਰ ਫੁੱਟਣਾ ਹੈ ਬਾਹਰ ਰੋਕ ਕੇ ਪੇਟ ਨੂੰ ਅੰਦਰ ਤੇ ਬਾਹਰ ਚਲਾਉਣਾ ਹੈ ਇਸ ਕਿਰਿਆ ਨੂੰ 65 ਵਾਰ ਦਰਾਉਂਦੇ ਰਹੋ ਜੋੜੀ ਬਾਰੇ ਮੈਂ ਆਪ ਜੀ ਨੂੰ ਦੱਸ ਰਿਹਾ ਹਾਂ ਦੋਵੇਂ ਕਿਰਿਆਵਾਂ 8-10 ਦਿਨ ਕਰਨ ਤੋਂ ਬਾਅਦ ਨਿਉੜੀ ਕਿਰਿਆ ਕੀਤੀ ਜਾ ਸਕਦੀ ਹੈ ਉਸੇ ਤਰ੍ਹਾਂ ਹੀ ਸਵਾਸ ਨੂੰ ਪਹਿਲਾਂ ਨਾਸਕਾ ਦੁਆਰਾ ਥਾਣੀ ਅੰਦਰ ਪਰਣਾ ਹੈ ਫਿਰ ਇੱਕਦਮ ਫੁਕਾਰਾ ਮਾਰ ਕੇ ਮੂੰਹ ਥਾਣੀ ਸਵਾਸ ਨੂੰ ਬਾਹਰ ਸੁੱਟ ਦੇਣਾ ਹੈ ਬਾਹਰ ਰੋਕ ਲੈਣਾ ਹੈ ਫਿਰ ਪੇਟ ਨੂੰ ਖਿੱਚ ਕੇ ਰੀੜ ਦੀ ਹੱਡੀ ਨਾਲ ਲਗਾਉਣਾ ਹੈ ਮੁਰਦਵਾ ਵੱਖੀਆਂ ਨੂੰ ਸੱਜੀ ਤੇ ਖੱਬੀ ਵੱਖੀ ਨੂੰ ਅੰਦਰ ਦੀ ਸਾਈਡ ਖਿੱਚ ਕੇ ਰੱਖੋ ਅਤੇ ਵਿਚਲੀ ਸਾਈਡ ਨੂੰ ਟਿੱਲਾ ਛੱਡ अंदर ਸੱਜੀ ਅਤੇ ਵੱਖੀ ਖੱਬੀ ਵੱਖੀ ਦੋਵੇਂ ਅੰਦਰ ਖਿੱਚੀਆਂ ਰਹਿਣ ਦੋਵੇਂ ਹੱਥ ਪੱਟਾਂ ਦੇ ਰੱਖੀ ਰੱਖੋ ਪੰਜ ਸਤਾਰ ਸੱਜਾ ਹੱਥ ਸੱਜੇ ਪੱਟ ਤੇ ਰਹੇਗਾ ਖੱਬਾ ਹੱਥ ਖੱਬੇ ਪੜਤੇ ਹੀ ਰਹੇਗਾ ਪੱਟਾਂ ਦੀ ਥੱਲੇ ਨੂੰ ਵਾਰੀ-ਵਾਰੀ ਮਾਲਿਸ਼ ਕਰੋ ਪਹਿਲੋ ਸੱਜਾ ਹੱਥ ਥੱਲੇ ਲੈ ਜਾਓ ਫੇਰ ਖੱਬਾ ਹੱਥ ਉਪਰੋਂ ਥੱਲੇ ਪੱਟ ਤੱਕ ਛਕਾਓ ਫੇਰ ਸੱਜਾ ਥੱਲੇ ਨੂੰ ਛਕਾਓ ਵਾਰੀ-ਵਾਰੀ ਦੋਆ ਪੱਟਾਂ ਦੀ ਮਾਲਿਸ਼ ਉਤੋਂ ਥੱਲੇ ਨੂੰ ਕਰੋ ਇਹਦੇ ਨਾਲ ਨਿਉੜੀ ਸੱਜੇ ਅਤੇ ਖੱਬੇ ਚੱਲਣ ਲੱਗੇਗੀ ਨੇਉਣ ਦੀ ਕਿਰਿਆ ਜੇਕਰ ਕਿਸੇ ਅਤਿਆਰੀ ਦੀ ਦੇਖਣੇ ਵਿੱਚ ਕੀਤੀ ਜਾਏ ਤਾਂ ਬਹੁਤ ਹੀ ਅੱਛੀ ਗੱਲ ਹੈ ਹੁਣ ਹੱਸਣ ਦੀ ਕਿਰਿਆ ਕਰਾਂਗੇ ਹੱਸਣ ਨਾਲ ਬਹੁਤ ਸਾਰੇ ਰੋਗ ਮਨੁੱਖ ਦਾ ਖਿਹੜਾ ਛੱਡ ਦਿੰਦੇ ਹਨ ਅਤੇ ਆਦਮੀ ਹਮੇਸ਼ਾ ਲਈ ਤੰਦਰੁਸਤੀ ਪਰਿਆ ਜੀਵਨ ਜੀਉਂਦਾ ਹੈ ਲੰਮਾ ਜੀਵਨ ਜੀਉਂਦਾ ਹੈ ਖਿਹੜੇ ਵਣਦਾ ਹੈ ਮੇਰੇ ਨਾਲ ਸਾਰੇ ਖਿੜਖੜਾ ਕੇ ਹੱਸੋ ਹੋ ਜੋਰ ਨਹੀਂ ਹੱਸੋ ਜੋਰ ਲਗਾ ਕੇ ਹੱਸੋ ਖੁੱਲ ਕੇ ਹੱਸੋ ਬੱਸ ਬੱਸ ਬੱਸ ਮਨ ਜੋਰ-ਜੋਰ ਦੀ ਤਾੜੀਆਂ ਮਾਰਾਂਗੇ ਤਾੜੀਆਂ ਮਾਰਨ ਨਾਲ ਹੱਥਾਂ ਦਾ ਇੱਕ ਪ੍ਰੈਸ਼ਰ ਹੋ ਜਾਂਦਾ ਹੈ ਸਾਰੇ ਪੁਆਇੰਟ ਪੈਸ ਹੋ ਜਾਂਦੇ ਹਨ ਮੇਰੇ ਨਾਲ ਮਿਲ ਕੇ ਤਾੜੀਆਂ ਮਾਰੋ ਪੂਰਾ ਜੋਰ ਲਾ ਕੇ ਇਸ ਕਿਰਿਆ ਨੂੰ 2 ਤੋਂ ਲੈ ਕੇ 5 ਮਿੰਟ ਤੱਕ ਤੁਸੀਂ ਕਰ ਸਕਦੇ ਹੋ ਹੱਥਾਂ ਦੇ ਸਾਰੇ ਪੁਆਇੰਟ ਪੈਸ ਹੋਣ ਨਾਲ ਤੁਸੀਂ ਤੇਜ਼ੀ ਨਾਲ ਤੰਦਰੁਸਤੀ ਵਾਲਦ ਹੋਗੇ ਤੁਸੀਂ ਹਮੇਸ਼ਾ ਮੇਖਾ ਲਈ ਰੋਗ ਮੁਕਤ ਰਹੋਗੇ ਲੰਮਾ ਜੀਵਨ ਜੀਓ ਹੁਣ ਹੱਥਾਂ ਦੀਆਂ ਤਾਲੀਆਂ ਰਗੜੋ ਪੂਰੀ ਸਰੀਰ ਨਾਲ ਰਗੋ ਵੱਤ ਵਤ ਹੱਥਾਂ ਦੀਆਂ ਤਾਲੀਆਂ ਗਰਮ ਹੋ ਜਾਣ ਕੋਮਲਤਾ ਨਾਲ ਅੱਖਾਂ ਬੰਦ ਕਰਕੇ ਸਾਰੇ ਚਿਹਰੇ ਉੱਤੇ ਹੱਥਾਂ ਦਾ ਸਪਰਸ਼ ਕਰੋ ਦੁਬਾਰਾ ਫੇਰ ਇੱਕ ਵਾਰ ਰਗੜੋ ਇਸ ਸੂਰਜਾ ਨੂੰ ਇਸ ਗਰਮੀ ਨੂੰ ਸਾਰੇ ਸੀਰ ਤੇ ਤਾਲ ਕਰੋ ਹੱਥਾਂ ਦਾ ਸਪਰਸ਼ ਸਾਰੇ ਸੀਰ ਤੇ ਕਰੋ ਜਿੱਥੇ ਜਿੱਥੇ ਤੁਹਾਡੇ ਤਕਲੀਫ ਹੈ ਉੱਥੇ ਉੱਤੇ ਖਾਸ ਕਰਕੇ ਆਪਣੇ ਹੱਥਾਂ ਦਾ ਸਪਰਸ਼ ਕਰੋ ਹੁਣ ਚੌਂਕੜਾ ਮਾਰ ਕੇ ਸੁਖ ਆਸਣ ਵਿੱਚ ਬੈਠ ਜਾਓ ਦੋਵੇਂ ਹੱਥ ਤੇ ਜੋੜ ਲਓ ਕਮਰ ਤੇ ਗਰਦਨ ਸਿੱਧੀ ਰਹੇ ਅੱਖਾਂ ਕੋਮਲਤਾ ਨਾਲ ਬੰਦ ਕਰ ਲਓ ਮੇਰੇ ਪਿੱਛੇ-ਪਿੱਛੇ ਬੋਲੋ ਏ ਅਕਾਲ ਪੁਰਖ ਪਰਮ ਪਿਤਾ ਪਰਮੇਸ਼ਵਰ ਜੀ ਸਾਨੂੰ ਹਨੇਰੇ ਤੋਂ ਪ੍ਰਕਾਸ਼ ਵੱਲ ਅਗਿਆਨ ਤੋਂ ਗਿਆਨ ਵੱਲ ਜੁਰਤੋਂ ਸੱਚਵਾਲ ਪਾਪ ਤੋਂ ਬਨਵਾਲਾ ਚਲੋ ਦਿਨ ਪਰ ਕੋਈ ਐਸਾ ਕਾਰਜ ਨਾ ਕਰੀਏ ਜਿਦੇ ਨਾਲ ਕਿਸੇ ਦੀ ਆਤਮਾ ਕਿਸੇ ਦਾ ਤਾਨ ਕਿਸੇ ਦਾ ਮਨ ਦੁੱਖ ਪਾਵੇ ਉਹ ਕਾਰਜ ਕਰਾਓ ਜੋ ਆਪ ਜੀ ਨੂੰ ਪਾਵੇ ਉਸ ਰਸਤੇ ਪਾਓ ਜੋ ਜੀ ਕੇ ਦਰਕ ਕੋ ਲੈ ਜਾਵੇ ਇਹ ਅਰਦਾਸ ਕਰਦੇ ਹੋਏ ਆਪਣੇ ਸਤਿਗੁਰੂ ਇਸ਼ਟ ਦੇਵਤਾ ਦੇ ਚਰਨਾਂ ਵਿੱਚ ਸੀਸ ਨਵਾ ਦਿਓ ਨਮਸਕਾਰ ਕਰ ਦਿਓ ਸਾਰੀ ਧਰਤੀ ਮਾਤਾ ਨੂੰ ਨਮਸਕਾਰ ਕਰੋ ਸਾਰੇ ਬ੍ਰਹਮਣ ਸਾਰੇ ਜੀਵ ਜੰਤੂਆਂ ਨੂੰ ਨਮਸਕਾਰ ਹਾਰੀ ਮੁਨੱਖ ਜਾਤੀ ਨੂੰ ਨਮਸਕਾਰ ਤੁਹਾਡਾ ਧੰਨਵਾਦ ਨਮਸਕਾਰ